शलोक मोहल्ला चौथा अमरी जेबा एक प्रभ हर के गुण अगम अथ हम क्यों कर जपें याणिया हर तुम वड् अगम आगा अमरी जेबा एक प्रभ हे त्रव ताटी ता जीव है असल जे एक को जीव है ਹਰ ਕੇ ਗੁਣ ਆਗਮ ਅਥਾ ਤੇਰੇ ਗਮ ਅਥਾ ਗੁਣ ਨੇ ਇਸ ਕਰਕੇ ਜੀਵਨਾ ਜਪਣਾ ਤੇਰਾ ਵਿਚਾਰ ਨਹੀਂ ਹੈ ਤੇਰਾ ਜਾਪ ਨਹੀਂ ਤੇਰਾ ਜਾਪ ਹੈ ਹਿਰਦੇ ਚ ਸਮਝਣਾ ਹਿਰਦੇ ਚ ਵਿਚਾਰਨਾ ਹੈ ਆਹ ਕਿੰਨੇ ਕਹਦੇ ਜਪਾਂ ਕਿਉਂ ਤੁਮੇ ਜਪੀਏ ਗਿਆਨਿਆ ਨਾ ਸਾਨੂੰ ਪਤਾ ਹੈ ਜਪਣਾ ਕਿਵੇਂ ਕਿਹੂ ਜਪਣ ਸਮਝ ਵੀ ਹੈ ਦੀ ਹਰ ਤੁਮਾ ਵੱਡ ਅਗੰਭਾ ਥਾ ਤੂੰ ਵੱਡਾ ਅਗੰਭ ਹੈ ਬੁੱਧੀ ਤੋਂ ਹੀ ਭਰੇ ਥਾ ਹੈ ਜਿੰਨਾ ਚਿਰ ਤੇਰੀ ਥਾ ਨਹੀਂ ਮਿਲ ਜਾਂਦੀ ਤੇਰੀ ਸਮਝ ਨਹੀਂ ਆ ਜਾਂਦੀ ਬੁੱਧੀ ਦੀ ਉਹਨਾਂ ਚਰ ਜਪਿਆ ਨਹੀਂ ਜਾ ਸਕਦਾ ਜਪਣ ਵਾਸਤੇ ਜਿਹੜਾ ਹੈ ਆ ਜਾਣਨ ਵਾਸਤੇ ਤੇਰੀ ਜਾਣਕਾਰੀ ਕਰਨ ਵਾਸਤੇ ਜਿਹੜਾ ਜਪਣਾ ਹੈ ਉਹਨਾਂ ਚਰ ਉਹੀ ਜਪਣਾ ਹੈ ਉਹਦੇ ਬਾਅਦ फिर ਦੇਖਾਂਗੇ ਕੀ ਕਰਨਾ ਪਹਿਲਾਂ ਤੈਨੂੰ ਜਾਣਤਾ ਲਈਏ ਜੇ ਤਾ ਤੂੰ ਅਗਾਮਾ ਤਾਂ ਇਹਨਾਂ ਪਤਾ ਹੀ ਨਹੀਂ ਤੂੰ ਹਾਂ कौन ਕਿੱਥੇ ਪਹਿਲਾਂ ਕਿਦੋਂ ਇਹਦਾ ਪਤਾ ਲੱਗੇ ਤੂੰ ਕੌਣ ਹੈ ਕਿੱਥੇ ਵਸਦਾ ਫਿਰ ਜਪਾਂ ਹੋਜੀ ਹਰ ਦੇਉ ਪ੍ਰਭੂ ਮਤ ਉਤਮਾ ਗੁਰ ਸਤਗੁਰ ਕੈ ਪੱਗ ਪਹਾ ਸਤ ਸੰਗਤੀ ਹਰ ਮੇਲ ਪ੍ਰਭ ਹਮ ਪਾਪੀ ਸੰਗ ਤਰਾ ਅਰਦੇਓ ਆ ਪ੍ਰਭੂ ਮਤ ਤੋਂ ਤਮ ਹੈ ਜੇ ਪ੍ਰਭੂ ਕੁਤ ਮਤ ਦੇਓ ਚਾਲੂ ਇਹ ਜਿਹੜੀ ਮੱਤ ਹੈ ਸਾਡੀ ਥੋੜੀ ਐ ਇਹ ਤੋਂ ਬਾਹਰ ਦੀ ਹੋਰ ਮਤ ਦੇਓ ਹੈ ਜਿਹੜਾ ਕੋਈ ਗੁਰ ਸਤਗੁਰ ਗੁਰ ਤੋਂ ਅੱਗੇ ਅੱਗੇ ਹੋ ਗਿਆ ਸਤਗੁਰ ਸਤਪੁਰਖ ਜੇ ਜਾਣਿਆ ਸਤਗੁਰ ਤੇ ਮਲਾ ਕੋਈ ਜਿਹੜਾ ਸਾਨੂੰ ਦੱਸੇ ਕਿ ਜਪਣਾ ਕਿਵੇਂ ਆ ਉਹਨੇ ਤਾਂ ਜਾਣ ਲਿਆ ਤੈਨੂੰ ਇਹਨੇ ਜਾਣ ਲਿਆ ਉਹ ਪਹਿਲਾਂ ਮੇਰੇ ਫਿਰ ਗਾਂ ਦੀ ਗੱਲ ਕਰੀਏ ਫਿਰ ਜਬ ਇਹ ਉਹ ਜਿਵੇਂ ਕਹੂ ਉਹਵੇਂ ਕਰੀਏ ਉਹਦੇ ਪੱਗ ਇਹ ਉਹਦੇ ਪਿੱਛੇ ਲੱਗੀਏ ਜਿਵੇਂ ਉਹਨੇ ਉਹ ਕਹੂਗਾ ਉਹਵੇਂ ਕਰੀਏ ਸਤ ਸੰਗਤੀ ਹਰ ਮੇਲ ਪ੍ਰਭ ਹਮ ਪਾਪੀ ਸੰਤ ਤਰਾ ਉਸ ਸਤਗੁਰ ਜਿਹੜਾ ਹੈਗਾ ਉਦੀ ਸੰਗਤ ਆ ਉਦੀ ਸੰਗਤ ਹੀ ਸਤ ਸੰਤ ਹੁੰਦੀ ਆ ਉਹਦੇ ਨਾਲ ਮੇਲ ਤੇ ਹਰ ਉਹਦੇ ਨਾਲ ਮੇਲ ਆ ਹੱਤਵ ਹਮ ਪਾਪੀ ਸੰਤਰਾ ਉਹਦੇ ਨਾਲ ਜੁੜ ਕੇ ਅਸੀਂ ਪਾਪੀ ਵੀ ਤਰ ਜਾਈਏ ਹਾਂਜੀ ਜਨ ਨਾਨਕ ਕੋ ਹਰ ਬਖਸ਼ ਲਿਓ ਮਮਾ ਪਾਪੀ ਕਿਰਮ ਤਰਾ ਹਾਂਜੀ ਜਨ ਨਾਨਕ ਕੋ ਹਰ ਬਖਸ਼ ਲਿਓ ਹਰ ਮੈਂ ਤੇਰਾ ਜਨ ਹਾਂ ਨਾਨਕ ਕੋ ਮੈਨੂੰ ਤਾਂ ਬਖਸ਼ ਲਿਓ ਹਰ ਟੁੱਠੇ ਮੇਲ ਬੁਲਾ ਜੇ ਹੁਣ ਟੁੱਠਾ ਹਿਆਂ ਮੇਰਾ ਵੀ ਮੇਲ ਬੁਲਾ ਦੇ ਮੈਨੂੰ ਵੀ ਆਪਣੇ ਨਾਲੇ ਬੁਲਾ ਦੇ ਨਾਮ ਨਾਲੇ ਬੁਲਾ ਦੇ ਕੋਈ ਹੋ ਜੀ ਇੱਥੇ ਹਰ ਕਿਰਪਾ ਕਰ ਤੁਨ ਬੇਨਤੀ ਕਿਰਪਾ ਕਰੀ ਸੁਣ ਬੇਨਤੀ ਤੂੰ ਪਾਪੀ ਕਰਮ ਰਾ ਨੇ ਕਿਰਪਾ ਕੀਤੀ ਹਰ ਕਿਰਪਾ ਕਰੀ ਲਾ ਹੋ ਹੈ ਕਿਰਪਾ ਕਰ ਦਿੱਤੀ ਉਹ ਸੁਣ ਕੇ ਪਹਿਲਾਂ ਕਿਰਪਾ ਕਰੀ ਸੁਣੀ ਵੇਖੀ ਵੇਖੀ ਸੁਣੀ ਕਿਰਪਾ ਕਰ ਦਿੱਤੀ ਹਮ ਪਾਪੀ ਕਰਮ ਰਾ ਹਮ ਪਾਪੀ ਕਰਮ ਸੀ ਅੰਬੀ ਤਰ ਗਏ ਤਰ मोहल्ला चौथा हर करो कृपा जग जीवना गुर सतगुरु मेल दयाल गुर सेवा हर हम भाइया हर होआ हर किरपाल कृपा कर, करो हर करो कृपा जग, जग जीवना हे जग जीवनु हे हर कृपा करो गुरु सतगुरु ਬੇਲ ਦਿਆਲ ਕੋਈ ਗੁਰ ਸਤਗੁਰ ਜਿਹੜਾ ਹੈ ਸਤਪੁਰ ਗੁਰੂ ਜਨਰ ਵਾਲਾ ਕੋਈ ਗੁਰਦੇਵ ਹੈ ਦਿਆਲ ਹੈ ਹੁੰਦਾ ਉਹ ਦਿਆਲ ਹੁੰਦਾ ਉਹਦਾ ਮੇਲ ਮਨਾਓ ਗੁਰ ਸੇਵਾ ਹਰ ਹਮ ਭਾਈ ਆ ਉਸ ਦੀ ਸੇਵਾ ਸਾਨੂੰ ਚੰਗੀ ਲੱਗਦੀ ਹੈ ਸਾਡੇ ਮਨ ਚਾਹੁੰਦਾ ਇੱਛਾ ਹੈ ਸਾਡੀ ਉਹਦੀ ਸੇਵਾ ਕਰਦੂ ਹਰ ਹੋਆ ਹਰ ਕਿਰਪਾਲ ਸਾਡੇ ਤੇ ਹੱਲ ਨੇ ਕਿਰਪਾ ਕੀਤੀ ਹੈ ਸਾਡਾ ਉਹਦੀ ਸੇਵਾ ਕਰਨ ਦੇ ਵਿੱਚ ਸਾਡੇ ਮਨ ਇੱਛਾ ਹੈ ਸਾਡੇ ਵਿੱਚ ਪਿਆ ਹੋਈ ਹੈ ਉਹਦੀ ਸੇਵਾ ਕਰੀਏ ਐਸੇ ਸਤਿਗੁਰ ਦਾ ਸਾਨੂੰ ਸੁੰਦਤ ਕਰਾਓ ਐਸੇ ਸਤਿਗੁਰ ਦੀ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰ ਤੁਠੇ ਨਾਮ ਦਰੜਾਇਆ ਹਮ ਕੀਏ ਸ਼ਬਦ ਨਿਹਾਲ ਆਸਾ ਮਨਸਤ ਵਿਚਰੀ ਆ ਜਿਹੜੀ ਸੰਸਾਰ ਦੀ ਆਸਾ ਮਨਸਤ ਸੀ ਨਾ ਉਹਦੀ ਇਛਾ ਇਹ ਤਾਂ ساری ਕੁਝ ਨਹੀਂ ਮਨ ਚੂਕਾ ਜੰਜਾਲ ਆ ਜੰਜਾਲ ਸੀ ਮਨ ਦਾ ਹੋਰ ਆਇਆ ਦਾ ਜੰਜਾਲ ਇਹ ਸਭ ਭੁੱਲ ਗਿਆ ਛੁੱਟ ਗਿਆ ਗੁਰ ਤੋਂ ਨਾਮ ਰੜਾਇਆ ਉਧਰ ਸਤਗੁਰ ਬੜਾ ਪ੍ਰਸੰਨ ਹੋਇਆ ਉਹਨੇ ਨਾਮ ਜੜ ਕਰਵਾਤਾ ਗੁਰਮਾਦੀ ਸੋਝੀ ਆ ਗਈ ਅਮ ਕੀਏ ਸ਼ਬਦ ਦਿਹਾਲ ਐਸਾ ਉਪਦੇਸ਼ ਦਿੱਤਾ ਅਸੀਂ ਦਿਹਾਲ ਹੋ ਗਏ ਉਸ ਦੇ ਨਾਲ ਕਿ ਹੱਡ ਵੀ ਪਿਓ ਸੁਣਾ ਰਹੇ ਨੇ ਆਪਣੀ ਚੌਥੇ ਬਾਦਸ਼ਾਹ ਹਾਂਜੀ ਗੁਰ ਤੁਠੇ ਨਾਮ ਦਿਲਾਇਆ ਅਮ ਕੀਏ ਸ਼ਬਦ ਦੀ ਨਿਹਾਲ ਜਨ ਨਾਨਕ ਅਟੁੱਟ ਧਨ ਪਾਇਆ ਹਰ ਹਰ ਧਨ ਮਾਲ ਨਾਨਕ ਨਾਨਕ ਦਾ ਜਿਹੜਾ ਜਨ ਸੀ ਨਾਨਕ ਦਾ ਚਾਟੜਾ ਸੀ ਨਾਨਕ ਦਾ ਛਿਛ ਸੀ ਅਟੁੱਟ ਤਨ ਪਾਇਆ ਅਟੁੱਟ ਤਨ ਪਾਇਆ ਅ ਘੁੱਟ ਖਜ਼ਾਨਾ ਪਾ ਲਿਆ ਗੋਬਦਾ ਹਰਨਾਮਾ ਹਰ ਤਨ ਮਾਲ ਕੀ ਪਾਇਆ ਹਰਨਾਮ ਦਾ ਖਜ਼ਾਨਾ ਪਾ ਲਿਆ ਹਰ ਤਨ ਹਰ ਮਾਲ ਵਸ ਇਹੀ ਗੁਣਾਂ ਦਾ ਖਜ਼ਾਨਾ ਪਾਇਆ ਇਹ ਨਹੀਂ ਹੁਣ ਮੁਕਦਾ ਜਿੰਨਾ ਮਰਜ਼ੀ ਖਰਚੀ ਜਾਈਏ ਇਹ ਉਹਨਾਂ ਵਰਗਾ ਹੀ ਹੈ ਵੱਧੋ ਆਤਮ ਗਿਆਨ ਦੀ ਸਮਝ ਆ ਗਈ ਸਾਰੀ ਸੋਝੀ ਆ ਗਈ ਤਿੰਨ ਲੋਕ ਦਾ ਗਿਆਨ ਹੋ ਗਿਆ ਸ਼ਬਦ ਗੁਰੂ ਮੇਲ ਹੋ ਗਿਆ ਉਲ ਮੁੱਕਣ ਵਾਲੀ ਕੋਈ ਗੱਲ ਨਹੀਂ ਹਾਂਜੀ ਇੱਥੇ ਸਿਹਾਰੀ ਜੀ ਨਾਨਕ ਨਾਨਕ ਨੇ ਅਟੁੱਟ ਧਨ ਪਾਇਆ ਹਰਨਾਮਾ ਹਰ ਤਨਮਾਲ ਇਹੀ ਅਟੁੱਟ ਧਨ ਹੈ ਜੀ ਹਾਂਜੀ ਹਾਂਜੀ ਅਸੀਂ ਕਹਿੰਦੇ ਨੇ ਆ ਵੀ ਗੁਰੂ ਘਰ ਲੰਗਰ ਵਰਤੇ ਗਾ ਅਸੀਂ ਆਪਣਾ ਰੋਟੀਆਂ ਨੂੰ ਕਹੀ ਜਾਂਦੇ ਆ ਉਹ ਟੁੱਟਾਂ ਹੈ ਜੀ ਨੇ ਫਿਰ ਲੰਗਰ ਵਸਤ ਹੋ ਜਾਂਦਾ ਹੁੰਦਾ ਉਹ ਲੰਗਰ ਹੁੰਦਾ ਨਾਲ ਉਹ ਰਸੋਈ ਲੰਗਰ ਦਾ ਨਾਮ ਹੁੰਦਾ ਸ਼ਬਦ ਦਾ ਲੰਗਰ ਹੁੰਦਾ ਹਾਂ ਜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸਭ ਜੋ ਧਿਆਵੈ हर ਅਪਰੰਪਰ ਹਰ हर ਹਰ ਧਿਆਏ ਹਰੇ ਤੇ ਹੋਣਾ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ اے ਹਰ ਤੂੰ ਵੱਡਾ ਕਿੰਨਾ ਵੀ ਕੋਈ ਹੋਵੇ ਸੱਚੋ ਤੋਂ ਵੱਡਾ ਵੱਡਾ ਵੀ ਹੈ ਉੱਚਾ ਵੀ ਹੈ ਉੱਚਾ ਬਸਤਾ ਤੇਰੀ ਉਸਤਾ ਉੱਚੀ ਹੈ ਵੱਡ ਵੱਡ ਉੱਚੇ ਜੋ ਉਪਰ ਵੱਡੇ ਗਡੋਨਾ ਜਿੰਨੇ ਵੱਡੇ ਤੋਂ ਵੱਡੇ ਨੇ ਇੱਥੇ ਗਿਆਨवान ਆ ਮੱਤਾਂ ਪਕਰਣ ਵਾਲੇ ਬਣਾਉਣ ਵਾਲੇ ਗੁਰੂ ਬਣੇ ਹੋਏ ਰਾਜੇ ਪਾਤਸ਼ਾਹ ਸਾਰੇ ਵੱਡਿਆਂ ਤੋਂ ਵੱਡੇ ਸੰਸਾਰ ਚ ਜੋ ਤੇ ਹਰ ਅਪਰੰਪਰ ਜਿਹੜੇ ਤੇਰੇ ਧਿਆਨ ਲਗਦੇ ਨੇ ਇਹ ਅਪਰੰਪਰ ਹਰ ਜਿਨ੍ਹਾਂ ਨੇ ਤੇਰੇ 'ਚ ਧਿਆਨ ਰੱਖਿਆ ਹਰ ਹਰ ਹਰ ਧਿਆਇ ਹਰੇ ਤੇ ਹਰੇ ਤੇ ਹੋ ਉਹ ਹਰੇ ਹਰ ਤੋਂ ਜੀਵ ਯੋਨਾ ਦਾ ਜਨਮ ਹਰੇ ਤੋਂ ਹੀ ਆਹਾ ਹਰੇ ਹੋਏ ਨੇ ਹਰੇ ਨਾਲ ਜੁੜ ਕੇ ਹੀ ਜਨਮ ਦੇ ਉਹ ਉਹਨਾਂ ਨੂੰ ਜਨ ਪਦਾਰਥ ਮਿਲਿਆ ਹਰ ਨਾਲ ਮਿਲ ਕੇ ਹੀ ਉਹਨਾਂ ਨੂੰ ਜਨਮ ਪਦਾਰਥ ਮਿਲੇ। ਹਰ ਨਾਲ ਮਿਲ ਕੇ ਹੀ ਉਹਨਾਂ ਨੂੰ ਨਾਮ ਮਿਲਿਆ। ਹਾਂਜੀ। ਠੀਕ ਹੈ ਜੀ। ਹਰੇ ਤੇ ਉਹਨਾਂ ਦਾ ਭਾਵ ਜਨਮ ਪਦਾਰਥ ਜੀ। ਹਾਂਜੀ ਹਾਂ। ਜੋ ਗਾਵੈ ਸੁਣੈ ਤੇਰਾ ਜਸ ਤਿਨ ਕਾਟੇ ਪਾਪ ਕਟੋਨਾ। ਤੁਮ ਹਰ ਪੁਰਖ ਜਾਣੇ ਮਤ ਗੁਰਮਤਿ ਮੁਖ ਵੱਡ ਵੱਡ ਭਾਗ ਵਡੋਨਾ। ਉਹ ਗਾ ਗਾ ਸੁਣੇ ਤੇਰਾ ਜਸ ਸਵਾਮੀ ਤੇ ਸਵਾਮੀ ਜਿਹੜੇ ਤੇਰਾ ਗਾ ਜਸ ਗਾਉਂਦੇ ਤੇ ਕਾਟੇ ਪਾਪ ਕਟੋਣਾ ਉਹਨਾਂ ਉਹ ਜਾਂ ਕੱਟਦੇ ਨੇ ਪਾਪ ਉਹਨਾਂ ਦੇ ਕੱਟੇ ਜਾਂਦੇ ਨੇ ਉਹ ਚਾਹੁੰਦੇ ਨੇ ਕੱਟਣੇ ਪਾਪ ਕੱਟੇ ਜਾਂਦੇ ਨੇ ਉਹਨਾਂ ਦੀ ਕਲਪਨਾ ਮਨ ਮਨ ਚ ਉਹਨਾਂ ਦਾ ਮਨ ਸਮਝਾਇਆ ਜਾਂਦਾ ਉਹ ਮਨ ਸਮਝਾ ਲੈਂਦੇ ਨੇ ਉਹ ਬੜਾ ਵਿਰੋਧ ਕਰਨਾ ਚਾਹੁੰਦਾ ਮਨ ਸਮਝਾ ਲੰਦਰ ਉਹਨਾਂ ਦਾ ਹੁਕਮ ਦਾ ਵਿਰੋਧ ਕਰਨਾ ਮਨ ਛੱਡ ਦਿੰਦਾ ਹੈ ਉਹ ਹੁਕਮ ਦਾ ਵਿਰੋਧ ਕਰਨਾ ਛੱਡਦਾ ਪਾਪ ਖਟੇ ਗਏ ਤੂੰ ਜੈਸੇ ਹਰ ਪੁਰਖ ਜਾਣੇ ਵੱਟ ਗੁਰਮਤ ਮੁਖ ਵੱਡ ਵੱਡ ਪਾਗ ਬੜੂ ਤੂੰ ਜਿਨਾ ਤੂੰ ਜੈਸੇ ਹਰ ਹਰ ਗੁਰਮੁਖ ਨੇ ਅਸੀਂ ਇਹ ਜਾਣਿਆ ਉਹ ਤੇਰੇ ਵਰਗੇ ਹੀ ਨੇ ਉਹਨਾਂ ਨਾਲ ਤੇਰੇ ਵਿੱਚ ਕੋਈ ਫਰਕ ਨਹੀਂ ਹਰ ਜਾਨਾ ਐਸਾ ਜਾਣੀਏ ਜੈਸਾ ਹਰੀ ਹੋਏ ਉਹਨਾਂ ਨਾਲ ਤੇਰੇ ਵਿੱਚ ਕੋਈ ਫਰਕ ਨਹੀਂ ਉਹ ਤੇਰੇ ਵਰਗੇ ਹੀ ਹੈ ਐਸਾ ਅਸੀਂ ਜਾਣਿਆ ਮੱਤ ਗੁਰਮਤ ਮੁੱਖ ਵੱਡ ਵੱਡ ਭਾਗ ਬੜੋਨਾ ਉਹਨਾਂ ਦੇ ਮੂੰਹ ਚ ਗੁਰਮਤ ਹੁੰਦੀ ਹੈ ਮੂੰਹ ਚ ਗੁਰਮਤ ਦੀ ਗੱਲ ਕਰਦੇ ਨੇ ਵਡਿਆਈ ਤੇਰੀਓ ਕਰਦੇ ਨੇ ਵਢਾਈ ਵੱਡੇ ਦੀ ਕਰਦੇ ਨੇ ਆਪਣੇ ਨਹੀਂ ਕਰਦੇ ਵੱਡੇ ਕੀਆਂ ਵਢਾਈਆਂ ਅਜ ਕਹਿਣਾ ਕਹਿਣਾ ਜਾਈ ਪਾਗ ਵਡੋਣਾ ਉਹਨਾਂ ਦੇ ਵੱਡੇ ਪਾਗ ਹੁੰਦੇ ਨੇ ਉਹ ਵਢਾਈ ਆਪਣੀ ਨਹੀਂ ਕਰਦੇ ਵੱਡੇ ਦੀ ਵਢਾਈ ਕਰਦੇ ਨੇ ਹਾਂਜੀ ਸਭ ਤੇ ਆਵੋ ਜੁਗਾਦ ਸੱਤੇ ਪਰਤਖ ਸੱਤੇ ਸਦਾ ਸਦਾ ਸੱਤੇ ਜਨ ਨਾਨਕ ਦਾਸ ਦਸੋਨਾ ਕਬਤੇ ਆਵੋ ਸਾਡੇ ਤੇ ਆਵੋ ਕਿਰਨ ਤੇ ਸਤੇ ਆਦ ਸਚ ਰੂਪ ਨਕਵਾਦ ਸੱਖਿਆ ਹੈ ਨਾ ਜੁਗਾਦ ਸਤੇ ਜੁਗਾਦ ਸਚ ਰੂਪ ਤੇ ਪ੍ਰਤਖ ਸਚ ਰੂਪ ਪ੍ਰਤਖ ਸਤੇ ਪ੍ਰਤਖ ਜਿਹੜਾ ਹੁਣ ਸੱਚ ਹੈ ਹੈ ਕੀ ਸਚ ਰੂਪ ਸਦਾ ਸਦਾ ਸੱਚੇ ਜਿਹੜਾ ਨਾਨਕ ਹੋਸੀ ਵੀ ਸੱਚ ਹੈ ਉਹਨੂੰ ਉਹਦੇ ਜਿ ਧਿਆਨ ਰੱਖੋ ਕੋਈ ਕੋਈ ਆਹੋ ਜਨ ਨਾਨਕ ਦਾਸ ਦਸੋਨਾ ਜਾਂ ਨਾਨਕ ਦਾਸ ਕਹਿੰਦਾ ਉਹ ਦਾਸਾਂ ਦਾ ਦਾਸ ਹੋ ਜੂਗਾ ਉਹ ਇਹੀ ਦੱਸਣ ਵਾਲੀ ਗੱਲ ਹੈ ਦਾਸਾਂ ਨੂੰ ਦਾਸਾਂ ਨੂੰ ਜਿਹੜੇ ਉਹਦੇ ਦਾਸ ਨੇ ਇਹ ਗੱਲ ਦੱਸੋ ਕਿ ਆ ਧਿਆਨ ਰੱਖੋ ਸਾਰੇ ਆਦਿ ਸੱਚ ਜੁਗਾਦ ਸੱਚ ਹੈ ਪੀ ਨਾਨਕ ਹੋਸੀ ਵੀ ਸੱਚ ਇਨੂੰ ਧਿਆਵੋ ਇਹ ਹੀ ਸਭ ਕੁਝ ਹੈ ਹਾਂਜੀ ਠੀਕ ਹੈ ਜੀ ਇਹ ਆਪਣਾ ਪਹਿਲਾ ਸ਼ਲੋਕ ਜਿਹੜਾ ਹੈਗਾ ਜਾਫੀ ਸਾਹਿਬ ਦਾ ਹਾਂਜੀ ਕੋਲ ਨੂੰ ਹੀ ਦੁਬਾਰਾ ਖੋਲਿਆ ਹੈ ਜੀ ਸਭ ਧਿਆਵੋ ਆਦ ਸੱਤੇ ਜੁਗਾਦ ਸੱਤੇ ਪ੍ਰਤੱਖ ਸੱਤੇ ਸਦਾ ਸਦਾ ਸੱਤੇ ਜਨ ਨਾਨਕ ਦਾਸ ਦਸੋਨਾ ਇੱਥੇ ਪੰਜਵੀਂ ਪੌੜੀ ਸਮਾਪਤੀ ਹੈ ਜੀ